ਜੋ ਲੋਕ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਕਹਿ ਕੀ ਨਾਹੀ ਬਿੰਦ ਨਾਨਕ ਮੋਇਆ ਕਾ ਕੀ ਜੇ ਆਪ ਮਾਰੇ ਗੋਬਿੰਦ ਜਿਨ ਕੋ ਅੰਦਰ ਗਿਆਨ ਅੰਦਰ ਗਿਆਨ ਦਾ ਭੋਰਾ ਹੈ ਜੀ ਦੀ ਸਾਹਿਤ ਹੈ ਬਿੰਦ ਨਾਮ ਨਾਲ ਕੋ ਪਾਇਆ ਨੇ ਹੋ ਪਾਪ ਕਰਦੇ ਨੇ ਅੰਨੇ ਹੋ ਕੇ ਅਪੜੀ ਕਰਦੇ ਨੇ ਜੇਰਾ ਰੱਤੀ ਪਰ ਵੀ ਇਹਨਾਂ ਦੇ ਅੰਦਰ ਇਸ ਗੰਦਾ ਭੈਣੀ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੀ ਕਰਦੇ ਹੋ ਜਾਣ ਕੋ ਤਾਂ ਆਪਣੇ ਬਾਣੇ ਚੱਲਣ ਵਾਲਾ ਮਰਿਆ ਬਰਾਏ ਹੋਇਆ ਬਾਣਨਾ ਜੇ ਆਪ ਮਾਰੇ ਗੋਬੇ ਤੋਂ ਤਾਂ ਕੋ ਬਿੰਦੇ ਮਰੇ ਹੋਏ ਨੇ ਜਿਹੜੇ ਕੋ ਬਿੰਦੇ ਦੀ ਇੱਜ਼ਾਤ ਤੋਂ ਮਰਿਆ ਮਰਾਈ ਹੋਇਆ ਜਿਹੜੇ ਆਪਣੇ ਮੂਲ ਨਾਲ ਜੁੜੇ ਨਹੀਂ ਹੋਏ ਇਹਨਾਂ ਨੂੰ ਗੁਬਨ ਸੜਿਆ ਬੁਧੇ ਦੇਣਾ ਹੀ ਛੱਡਦਾ ਮੈਂ ਮੋਹ ਲੈਦਾ ਇਹਨਾਂ ਛੱਡੋ ਪਰੇ ਉਹ ਆਤਮਾਰੇ ਗੁਰੂ ਦੇ ਜੀ ਹਾਂਜੀ ਮਹੱਲਾ ਤੀਜਾ ਮਨ ਕੀ ਪਤਰੀ ਬਾਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਕੀ ਪਤਰੀ ਬਾਜਣੀ ਮਨ ਦੀ ਕੀ ਕਰਦਾ ਇਹ ਬੰਦ ਜਿਹੜਾ ਕੀ ਮੰਡੀ ਬੈਠਾ ਕੀ ਲੱਗੀ ਬੈਠਾ ਇਹ ਪਤਰੀ ਬਾਜਦਾ ਤੂੰ ਬਾਹਰ ਮਨ ਕੀ ਪਤਰੀ ਆਹ ਕਰਦਾ ਮੈਂ ਉਹ ਕਰਦਾ ਮੈਂ ਕੁੱਲ ਕਰਦਾ ਮੈਂ ਕਾਪਦਾ ਇਹਦੀ ਇਹ ਪਤਰੀ ਬਾਜ ਜਿਹੜਾ ਲਿਖ ਰਿਹਾ ਹੈ ਦੇਖਾ ਕਿ ਕਿ ਹੋਂ ਸੰਸਾਰ ਉਹ ਉਹਦੇ ਵਿੱਚ ਦੁੱਖ ਹੈ ਬੰਦੇ ਜੇ ਤੇ ਅਨਲਖਣਾ ਕਹਿੰਦੇ ਬੋਲਦਾ ਧਿਆਨ ਲਖ ਤੇ ਕੀ ਕਰਦਾ ਇਹਨੂੰ ਉਲਟੇ ਪਾਸੇ ਜਾਣ ਤੋਂ ਰੋਕ ਕੋ ਬ੍ਰਾਹਮਣ ਤੋਂ ਪਲਾਪ ਆਖੀ ਹੈ ਇਹ ਗੁਰੂ ਵਿਚਾਰ ਉਹ ਬ੍ਰਾਹਮਣ ਪ੍ਰਭੂ ਵਿਚਾਰ ਹੈ ਜਿਹੜਾ ਜਿਹੜਾ ਪਰਮੇ ਵਿਚਾਰ ਨਹੀਂ ਕਰਦਾ ਬ੍ਰਾਹਮਣ ਕਰਦਾ ਸੋ ਬ੍ਰਾਹਮਣ ਭਲਾ ਆਖੀਏ ਉਹ ਹੀ ਬ੍ਰਾਹਮਣ ਭਲਾ ਹੈ ਲੋਕਾਂ ਦਾ ਭਲਾ ਕਰਵਾੜਾ ਆਖਿਆ ਜਾਊਗਾ ਜੇ ਭੂਜੇ ਬ੍ਰह्म ਵਿਚਾਰ ਜੇ ਬ੍ਰह्मਚਾਰ ਨੂੰ ਭੂਜੇ ਬ੍ਰह्मਚਾਰ ਨੂੰ ਆਪ ਭੂਜੇ ਤੇ ਨੂੰ ਭੁਜਾਵੇ ਦੁਤਿਆਂ ਬਾਰੇ ਸਮਝਾਵੇ ਦਿੱਤੇ ਹਾਂਜੀ ਹਰ ਸਾਲ ਹਰ ਪੜਾਏ ਕਰਕੇ ਸ਼ਬਦ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੋਲ ਕਰੇ ਉਧਾਰ ਜਿਹੜਾ ਕਦੇ ਜੰਮਿਆ ਮਰਦਾ ਨਹੀਂ ਆ ਰਿਹਾ ਉਹ ਹੀ ਗੱਲ ਹੈ ਉਹ ਜੇ ਹਰ ਪੜੇ ਹਰ ਨੂੰ ਪੜੇ ਹਰ ਨੂੰ ਜਾਣੇ ਨਾ ਕੀ ਹੈ ਕੋਰਕਾ ਸ਼ਬਦ ਵਿਚਾਰ ਆ ਗੋਰੀ ਜਿਹੜਾ ਸ਼ਬਦ ਵਿਚਾਰ ਇਹ ਸ਼ਬਦ ਰੂਪ ਜਾ ਗੁਰੂ ਦੇਸ ਨੂੰ ਜੇ ਵਿਚਾਰ ਦਾ ਸਾਰ ਪੜ ਲੰਦਾ ਜੀ ਇਹ ਹਾਂ ਕਿ ਸਮਝਣ ਦਾ ਸੀ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੋਲਤਾ ਕਰੇਦਾ ਉਹਦਾ ਇਹ ਬ੍ਰਾਹਮਣ ਦਾ ਜਿਹੜਾ ਆਇਆ ਪ੍ਰਵਾਨ ਦਰਗਾਹੇ ਜਿਹੜਾ ਆਪਣੀ ਕੁਲ ਦਾ ਅਧਾਰ ਕਰੇ ਕੋਈ ਨਹੀਂ ਕਿ ਇਹ ਮਾਨਸਿਕਾ ਜਗ ਵਿੱਚ ਸਾਰੇ ਦੁਨੀਆਂ 'ਚ ਵੀ ਮਾਨਸਨ ਦੇ ਸਾਰਿਆਂ ਦਾ ਆਧਾਰ ਕਰੇ ਉਹ ਦੁੱਖ ਹੋਦਾ ਦੇ ਜਿੰਨੇ ਵੀ ਮਾਨਸਨ ਨੇ ਜਵਦਾ ਦਾ ਕਰੇ ਸਭ ਜਿੰਦਗੀ ਸਿੱਖਿਆ ਦੇ ਉਹਦਾ ਉਹ ਪ੍ਰਮਾਣ ਅਨਸਾਰ ਜਨਮ ਲੈਣ ਬ੍ਰਾਹਮਣ ਦਾ ਜਨਮ ਲੈਣਾ ਸਾਦਾ ਪ੍ਰਵਾਨ ਵਿਦਾ ਜਿਹੜਾ ਜਨਮ ਪ੍ਰਵਾਨ ਨਹੀਂ ਉਹ ਜਾਤ ਨਾ ਪੁੱਛੀ ਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੱਗੇ ਇਹ ਪੁੱਛਣਾ ਦੇਣਾ ਕਿ ਬ੍ਰਾਹਮਣਾਂ ਕੀਆ ਖਤਰੀ ਹੋ। ਅੱਗੇ ਯਾਤਰਾ ਕੀਤੀ ਕਰਨੀ ਹੈ ਉਹ ਸਾਰ ਖਬਦੀ ਆ ਜਿਹੜਾ ਗੁਰਬਾਣੀ ਇਹਦੇ ਮਤਾਬ ਜੇ ਤੇਰੀ ਕਰ ਹੈ ਇਹਦੀ ਤਾਂ ਕੁਛ ਹੈਗਾ ਹਾਂ ਕੋਈ ਤੇ ਕਹਿੰਦੇ ਕੁਛ ਨਹੀਂ ਤੇਰੀ ਯਾਤੂ ਬ੍ਰਾਹਮਣ ਜੇ ਤਾਂ ਬ੍ਰह्मਚਾਰੀਆ ਵੀ ਕੁਛ ਹੈਗਾ ਹਾਂ ਹੋਰ ਕੂੰਡ ਪੜਨਾ ਕੂੰਡ ਕਹਾਵਣਾ ਲਿਖਿਆ ਨਾੜ ਪਿਆਰ ਜੇ ਤੂੰ ਬੱਖੀ ਕੂਦ ਹੋਰ ਕਰਦਾ ਪਤਲੀ ਬਾਜਿੰਦੀ ਕੁਛ ਐ ਦੇਤੀ ਇਹ ਹੋਰ ਕੁਛ ਕਰ ਲਿਆ ਜੇਬਰ ਤੇ ਖਿਆਸਰਾ ਦੀਆਂ ਗੱਲਾਂ ਸੁਣਾਤੀ ਇਹ ਸਭ ਕਹਾਣੀਆਂ ਸੁਣਾਤੀ ਇਹ ਕੋਡ ਕਮਾਈ ਹੈ ਤੇਰੀ ਪੂਰ ਸਭਾਵਣਾ ਵਿਖਿਆ ਨਾਲ ਪਿਆਰੇ ਤਾਂ ਮੰਨ ਤੇਰਾ ਜਿਹੜਾ ਪਿਆਰ ਹੈ ਸਾਜ ਨਾਲ ਨਹੀਂ ਝੂਠ ਨਾਲ ਮਾਇਆ ਨਾਲ ਪਿਆਰ ਹਾਂਜੀ ਅੰਦਰ ਸੁੱਖ ਨਾ ਹੋ ਬਈ ਮਨਮੁਖ ਜਨਮ ਕੁਆਰ ਨਾਨਕ ਨਾਮ ਰਤੇ ਸੇ ਸੇ ਸੁਖ ਵੀ ਹੋ ਸਕਦਾ ਇਹਨਾਂ ਗੱਲਾਂ ਨਾਲ ਅੰਦਰ ਦੁੱਖ ਵੀ ਪੈਦਾ ਹੋ ਸਕਦਾ ਜਿਹੜਾ ਤੂੰ ਜੋ ਕੁਝ ਕਰ ਰਿਹਾ ਹੈ ਮਨੁੱਖ ਜਾਨਵਰ ਖਵਾ ਦਾ ਤਾਂ ਜਾਨਵਰ ਖਵਾ ਹੁੰਦਾ ਹੈ ਅਜਾਈ ਜਾਂਦਾ ਉਹ ਤਾਂ ਦਾ ਤੂੰ ਗੁਰੂ ਖਾਣੇ ਕਦੋਂ ਕਰਦਾ ਜਾਂ ਅਜਾਈ ਚਲੇ ਜਾਊਗਾ ਬਾਵੇਂ ਤੋਂ ਗ੍ਰਾਮ ਹਟ ਪੜ੍ਹ ਲੈ ਆਪਣੇ ਬ੍ਰਾਹਮਣ ਕਾਂਦੇ ਹੋ ਨਾਨਕ ਨਾਮ ਰਤੇ ਸੇ ਉਭਰੇ ਗੁਰ ਕਾ ਹੇਤ ਅਪਾਰ। ਪਰ ਨਾਨਕ ਦਾ ਨਾਮ ਰਤੇ ਸੇ ਉਭਰੇ ਜਿਹੜੇ ਨਾਮ ਦਾ ਰੰਗ ਚੜੀ ਜਾਉ ਭਜੇ। ਵਾਰੀ ਤੋਂ ਭਟ ਗਏ ਉਹ ਨਾ ਜਾਣ ਉੱਪਰ ਅਪਾਰ। ਗਿਆਨ ਦੇ ਨਾਲ ਪ੍ਰੇਮ ਉਹਨਾਂ ਦਾ। ਐਸਾ ਗਿਆਨ ਆਇਆ ਜਿਹਦਾ ਪਾਰ ਇਹਦੀ ਰੂਹ ਪੱਜਾਈ ਨਹੀਂ। ਗਿਆਨ ਹੈ ਜਿਹੜਾ ਗੁਰਮੱਤ ਗਿਆਨ ਹੈ। ਇਹ ਅਪਾਰ ਗਿਆਨ ਹੈ ਇਹ ਅਨਲਿमिटेड ਗਿਆਨ ਹੈ ਇਹਦੇ ਨਾਲ ਜਿਹਨਾਂ ਦਾ ਪਿਆਰ ਹੈ ਉਹ ਬੁਰੇ ਆਪੇ ਕਰ ਕਰ ਵੇਖਦਾ ਆਪੇ ਸਭ ਜੋ ਹੁਕਮ ਨਾ ਬੁੱਝਿਆ ਖਸਮ ਕਾ ਸੋਈ ਨਰਕਾੱਚਾ ਆਪੇ ਕਰ ਕਰ ਵੇਖਦਾ ਉਹ ਪਰਮੇਸ਼ਰ ਆਪੇ ਪੈਦਾ ਕਰਦਾ ਸਾਰਿਆਂ ਦੇ ਰਿਣਾ ਵੀ ਹੁੰਦੀ ਹੈ ਕੋਈ ਕੀ ਕਰਦਾ ਅੱਪੇ ਸੱਚਾ ਸਭ ਸੱਚਾ ਅੱਪੇ ਹੀ ਸਾਰੇ ਫੈਲ ਹੈਗਾ ਉਹਦਾ ਆਪਣਾ ਸਾਰਾ ਜੋ ਕੋਈ ਮੂਰ ਮੁੱਚੇ ਖਰਮ ਦਾ ਕੋਈ ਨਾ ਸੱਚਾ ਜਿਹੜਾ ਉਹਨੂੰ ਭੁਜਦਾ ਨਹੀਂ ਇਹ ਦੇਖਦਾ ਉਹ ਨਿਗਾਹ ਨਰ ਕਰਚਾ ਉਹਦਾ ਮਾਇਆਦਾਰੀ ਇਹ ਸਨਾ ਬੋਲਦਾ ਹਾਂਜੀ ਜਿਤ ਭਾਵੈ ਤਿਤ ਲਾਇੰਦਾ ਗੁਰਮੁਖੀ ਹਰ ਸੱਚਾ ਸਭਨਾ ਦਾ ਸਾਹਿਬ ਇੱਕ ਹੈ ਗੁਰ ਸ਼ਬਦੀ ਰਚਾ ਜਿਹਨੂੰ ਭਾਜਵੇ ਨਾ ਖਿਦਾ ਉਹ ਆਪਣੇ ਨਾਲ ਜੋੜ ਲੈਂਦਾ ਉਹ ਉਹ ਇਦਾਂ ਲਾ ਸੱਚ ਭਾਜਵੇ ਉਹਨੂੰ ਲਾ ਲੈਂਦਾ ਗੁਰਮੁਖੀ ਆਰ ਸੱਚਾ ਜਿਹੜਾ ਗੁਰਮੁਖੀ ਹੁੰਦਾ ਹੈ ਉਹ ਸੱਚਾ ਹੁੰਦਾ ਹੈ ਹਰੇ ਸੱਚਾ ਵਰਮਾ ਦਾ ਹਰੇ ਸੱਚਾ ਹੁੰਦਾ ਕਈਆਂ ਦਾ ਅਰਥ ਉਠਾ ਹੁੰਦਾ ਅਜਿਹੇ ਜੂਰਤੀ ਵਾਲਾ ਹਰ ਬਣਾਇਆ ਝੂਠਾ ਸੱਚਾ ਹਾਲ ਨਹੀਂ ਹੈ ਸਤਨਾਕਾ ਸਾਹਿਬ ਇਹ ਕਹੇ ਗੁਰ ਸ਼ਬਦ ਸਾਰਿਆਂ ਦਾ ਸਾਹਿਬ ਦਾ ਕੋਈ ਆ ਵੈਸੇ ਜਿਹੜਾ ਤੂੰ ਹਰ ਬਣਾਈ ਬੈਠਾ ਸਾਰਿਆਂ ਦਾ ਇਹ ਕਹੇ ਗੁਰ ਸ਼ਬਦ ਜਿਹੜਾ ਸ਼ਬਦ ਤੇ ਵੀ ਸਮਾਇਆ ਹੋਇਆ ਹੈ ਹਾਂ ਹੁਕਮ ਨੇ ਵੀ ਸਮਾਇਆ ਹੋਇਆ ਹੈ ਉਹ ਹਰੇ ਸੱਚਾ ਹਮੇਸ਼ਾ ਰਹਿਣ ਵਾਲਾ ਠੀਕ ਹਾਂਜੀ ਗੁਰਮੁਖੀ ਸਦਾ ਸਲਾਹੀ ਹੈ ਸਭ ਇਸ ਦੇ ਜੱਚਾ ਜਿਉ ਨਾਨਕ ਆਪ ਨਚਾ인다 ਤਿਮਹੀ ਕੋ ਨੱਚਾ ਗੁਰਮੁਖੀ ਸਦਾ ਸਲਾਹੀ ਹੈ ਗੁਰਮਖਾਂ ਦੇ ਸਦਾ ਹੋਸੀ ਸੋਧੀ ਫਰਾਂਗ ਉਹਨਾਂ ਕੀਤੀ ਹੈ ਉਹ ਤਾਂ ਖੱਟੇਲੀ ਸੀ ਜਦ ਕੀਤੀ ਹੈ ਮੇਸ਼ਾ ਹੈਗਾ ਆਦਮੀ ਜਿਹਦੇ ਜਨਮ ਨੇ ਹੋਗੀ ਦੀ ਕੀ ਕਿੱਡਾ ਰਾਜਾ ਹੋਵੇ ਕਿੱਡਾ ਕੋ ਸਿੱਖੀ ਹੋਵੇ ਸਭ ਤੋਂ ਸੇਜਾ ਜਿਹੜਾ ਉਹ ਤੋਂ ਹੀ ਪੈਦਾ ਹੋਇਆ ਹੈ ਜੀ ਜੋ ਪੈਦਾ ਹੋਇਆ ਹੈ ਉਹਦੀ ਸلسਲਾ ਨਹੀਂ ਕਿਕਰਦੀ ਸلسਲਾ ਨਹੀਂ ਕੀਤੀ ਕਰਤੇ ਨਹੀਂ ਕੀਤੀ ਜਿਵੇਂ ਨਾਨਕ ਆਪ ਜਿਸ ਬਚਾਇੰਦਾ ਜਿਵੇਂ ਉਹਨਾਂ ਨੇ ਸਾਰੀ ਦੁਨੀਆਂ ਉਹਦੇ ਵਿੱਚ ਹੈ ਉਹ ਦੌਰੋ ਤੇ ਹੱਥ ਕੇ ਹੀ ਹੈ ਸਾਰੇ ਨੱਚਦੇ ਉਹਦੇ ਵਿੱਚ ਆਏ ਲਈ ਗੁਰੂ ਘਰ ਨੇ ਉਹ ਦੇਖ ਲਿਆ ਚਾਉਂਦੀ ਸਿੱਖ ਸਲਾਹ ਕਰਦੇ ਮਨੁੱਖਾਂ ਦੇ ਵਖਿਆ ਜੀ ਉਹ ਦੇਖੋ ਹੋਰ ਵੀ ਕਰੀ ਜਾਂਦਾ ਹੈ ਹਾਂਜੀ ਆ ਜਿਹੜਾ ਗੁਰਮੁਖੀ ਸਦਾ ਸਲਾਹੀਏ ਸਭ ਤਿਸ ਦੇ ਜੱਚਾ ਇਹਦਾ ਭਾਵ ਇਹ ਨਹੀਂ ਕਿ ਸਭ ਦਾ ਮੰਗਣ ਦੀ ਗੱਲ ਵੀ ਹੈ ਉਹ ਇਹ ਉਦਾਈ ਬਾਲਕ ਬਣ ਕੇ ਉਹਦੀ ਹੀ ਸਫਸਲਾ ਕਰੇ ਆਹ ਸਫਸਲਾ ਦਾ ਕਰਦਾ ਮਾਇਰ ਨਾਲ ਜਿਹੜਾ ਉਹਦੀ ਦੀ ਗੱਲ ਹੈ ਮੰਗਣ ਦੀ ਗੱਲ ਵੀ ਹੈ ਨਾ ਨਾ ਨਾ ਨਾ ਯਾਦ ਕਿ ਬੀ ਠੀਕ ਹੈ ਜੀ ਇੱਥੇ 22ਵੀਂ ਪੌੜੀ ਦੀ ਸਮਾਪਤੀ ਹੈ ਜੀ ਨਾਲੇ ਮਾਰੂ ਕੀ ਵਾਰ ਤੀਜਾ ਇਹਦੀ ਵੀ ਸਮਾਪਤੀ ਹੈ ਜੀ